ਜੀ ਕੰਗਾ ਕੇਸ ਕੜਾ ਕਿਰਪਾਨ ਇਹ ਗੁਰ ਸਿੱਖ ਦੀ ਪਹਿਚਾਨ ਕੰਗਾ ਕੇਸ ਕੜਾ ਕਰਪਾਨ ਇਹ ਗੁਰ ਸਿੱਖ ਦੀ ਪਹਿਚਾਨ ਕੰਗਾ ਕੇਸ ਕੰਗਾ ਕੇਸ ਕੜਾ ਕਿਰਪਾਨ ਇਹ ਗੁਰਸੇਖ ਦੀ ਪਹਿਚਾਨ ਕੰਗਾ ਕੇਸ ਕਦਾ ਕਰਪਾਨ ਇਹ ਹੈ ਦੀ ਪਹਿਚਾਨ ਇਸ ਕਦਾ ਕਰਪਾਨ ਇਹ ਦੀ ਪਹਿਚਾਨ ਇਹ ਹੈ ਦੀ ਪਹਿਚਾਨ ਗੁਰਸਖ ਦੀ ਪਹਿਚਾਨ ਇਹ ਹੈ ਗੁਰਸਖ ਦੀ ਪਹਿਚਾਨ ਪਹਿਚਾਨ ਗੁਰਸਖ ਦੀ ਪਹਿਚਾਨ ਕੰਗਾ ਕੇਸ ਕਦਾ ਕਰਪਾਣ ਇਹ ਹੈ ਗੁਰਸਖ ਦੀ ਪਹਿਚਾਨ ਕੰਗਾ ਕੇਸ ਕਦਾ ਕਰਪਾ ਇਹ ਹੈ ਗੁਰਸਖ ਦੀ ਪਹਿਚਾਨ ਪਹਿਤਾਂ ਇਹ ਮੇਰੇ ਸਿੱਖ ਦੀ ਪਛਾਣ ਹੋਵੇਗੀ ਅਰਜ ਕਰ ਰਿਹਾ ਸਾਂ ਸਾਹਿਬ ਕਲਗੀਧਰ ਪਾਤਸ਼ਾਹ ਦੇ ਇਹ ਇੱਕ ਵਾਰ ਬਣਾਈ ਸਿੱਖੀ ਨੂੰ ਬਚਾਉਣ ਵਾਸਤੇ ਤੇ ਆਪਣੇ ਸਿੱਖ ਨੂੰ ਉਹਨਾਂ ਨੇ ਜਾਗ ਦੀ ਜੋਤ ਨਾਲ ਜੋੜਿਆ ਹਮੇਸ਼ਾ ਵਾਸਤੇ ਕਿਉਂਕਿ ਉਹਨਾਂ ਦੀ ਬਾਣੀ ਹੈ ਦਸਮ ਪਾਤਸ਼ਾਹ ਦੀ ਬਾਣੀ ਹੈ ਪਰ ਇਹ ਸ਼ਬਦ ਬੜਾ ਹੀ ਮਸ਼ਹੂਰ ਕੀਤਾ ਹੋਇਆ ਹੈ ਰਾਗਿਆ ਨੇ ਤੇ ਬੁਲਾ ਰਹਿਆਂ ਨੇ ਜਾਗ ਦੀ ਜੋਤ ਦਾ ਅਰਥ ਹੈ ਚੇਤਨ ਪ੍ਰਕਾਸ਼ ਦੋ ਕਿਸਮ ਦਾ ਪ੍ਰਕਾਸ਼ ਸੰਸਾਰ ਵਿੱਚ ਵੇਖਿਆ ਜਾਂਦਾ ਇੱਕ ਹੈ ਚੇਤਨ ਪ੍ਰਕਾਸ਼ ਇੱਕ ਹੈ ਜੜ ਪ੍ਰਕਾਸ਼ ਚੇਤਨ ਪ੍ਰਕਾਸ਼ ਕਹਿੰਦੇ ਨੇ ਜਿਹੜਾ ਆਪਣੇ ਆਪ ਪ੍ਰਕਾਸ਼ ਹੋ ਰਿਹਾ ਹੈ ਇਹ ਸੂਰਜ ਜਿਹੜਾ ਦਾ ਸੂਰਜ ਨੂੰ ਚੇਤਨ ਪ੍ਰਕਾਸ਼ ਕਿਹਾ ਜਾਂਦਾ ਜਿਹੜਾ ਚੱਲਦਾ ਫਿਰਦਾ ਹੈ ਹਰ ਥਾਂ ਪਹੁੰਚ ਕੇ ਤੇ ਸੂਰ ਪ੍ਰਕਾਸ਼ ਕਰਦਾ ਭਾਵ ਹੈ ਕਿ ਜਾਗਦੀ ਜੋਤ ਦਾ ਨਾਮ ਹੈ ਚੱਲਦੀ ਫਿਰਦੀ ਜੋਤ ਚੇਤਨ ਪ੍ਰਕਾਸ਼ ਤੇ ਚੇਤਨ ਪ੍ਰਕਾਸ਼ ਐਸਾ ਹੁੰਦਾ ਕਿਸੇ ਨੂੰ ਲੋੜ ਹੋਵੇ ਜਾਂ ਨਾ ਹੋਵੇ ਪ੍ਰਕਾਸ਼ ਹੋਈ ਜਾਣਾ ਸੂਰਜ ਜਦੋਂ ਚੜਦਾ ਨਾ ਉਹ ਭਾਵੇਂ ਤੁਸੀਂ ਕਿਸੇ ਵੀ ਬੈਠੇ ਹੋਵੋ ਮੈਂ ਕਹਿੰਦਾ ਦਰਵਾਜ਼ੇ ਬੰਦ ਕਰਕੇ ਕੋਈ ਬਹਿ ਜਾਵੇ ਕਿ ਮੈਨੂੰ ਪ੍ਰਕਾਸ਼ ਦੀ ਲੋੜ ਨਹੀਂ ਪ੍ਰਕਾਸ਼ ਤਾਂ ਵੀ ਅੰਦਰ ਹੋ ਜਾਂਦਾ ਕਿਉਂਕਿ ਉਹਦਾ ਉਹਦੀ ਡਿਊਟੀ ਹੈ ਸੂਰਜ ਦਾ ਪ੍ਰਕਾਸ਼ ਜਿਹੜਾ ਇਹਦਾ ਨਾਮ ਹੈ ਚੇਤਨ ਪ੍ਰਕਾਸ਼ ਤੇ ਇਹਦੇ ਮੁਕਾਬਲੇ ਤੇ ਦੂਜਾ ਪ੍ਰਕਾਸ਼ ਹੈ ਦੀਵੇ ਦਾ ਪ੍ਰਕਾਸ਼ ਦੀਵੇ ਦਾ ਜਿਹੜਾ ਹੈ ਜੜ ਪ੍ਰਕਾਸ਼ ਹੈ ਧਿਆਨ ਰੱਖਣਾ ਦੀਵੇ ਦਾ ਪ੍ਰਕਾਸ਼ ਜਿਹੜਾ ਇਹ ਮਨੁੱਖ ਦੇ ਅਧੀਨ ਹੈ ਜਦੋਂ ਜੀ ਕਰੇ ਦੀਵਾ ਚਗਾ ਲਓ ਜਦੋਂ ਜੀ ਕਰੇ ਦੀਵੇ ਨੂੰ ਬਜਾ ਦਿਓ ਇਹ ਸਾਡੇ ਵੱਸ ਵਿੱਚ ਹੈ ਤੇ ਜਿਹੜਾ ਮਨੁੱਖ ਦੇ ਵੱਸ ਵਿੱਚ ਹੈ ਇਹ ਜੜ ਪ੍ਰਕਾਸ਼ ਹੈ ਦਾ ਨਾਮ ਮੈਂ ਕਈ ਵਾਰ ਅਰਜਾ ਕਰਨਾ ਹੁੰਦਾ ਇਹ ਹੋ ਕਿ ਸੂਰਜ ਵੀ ਪ੍ਰਕਾਸ਼ ਕਰ ਰਿਹਾ ਤੇ ਦੀਵਾ ਵੀ ਪ੍ਰਕਾਸ਼ ਕਰਦਾ ਪਿਆ ਤੇ ਸੂਰਜ ਜਿਹੜਾ ਉਹ ਆਪਣੇ ਆ ਪ੍ਰਕਾਸ਼ ਕਰ ਰਿਹਾ ਤੇ ਦੀਵਾ ਕਿਸੇ ਦੇ ਕੀਤਿਆਂ ਕਰਦਾ ਪਰ ਧਿਆਨ ਇਹ ਰੱਖਣਾ ਸੂਰਜ ਦਾ ਜੇ ਦੀਵਾ ਆਖੇ ਮੈਂ ਸੂਰਜ ਵਾਲੇ ਥਾਂ ਤੇ ਪ੍ਰਕਾਸ਼ ਕਰਦੇ ਤੇ ਨਹੀਂ ਜਾ ਸਕਦਾ ਪਰ ਸੂਰਜ ਵੀ ਦੀਵੇ ਵਾਲੇ ਥਾਂ ਨਹੀਂ ਜਾ ਸਕਦਾ ਆਪਣੀ ਆਪਣੀ ਜਿੱਥੇ ਡਿਊਟੀ ਆ ਉੱਥੇ ਹੀ ਰਹੇਗਾ ਕੁਦਰਤ ਦੇ ਨਿਯਮ ਬਣਾਏ ਹੋਏ ਨੇ ਮੈਂ ਅਰਜ ਕਰ ਰਿਹਾ ਸਾ ਦੋ ਕਿਸਮ ਦਾ ਪ੍ਰਕਾਸ਼ ਹੈ ਸੂਰਜ ਦਾ ਚੇਤਨ ਪ੍ਰਕਾਸ਼ ਹੈ ਦੀਵੇ ਦਾ ਜੜ ਪ੍ਰਕਾਸ਼ ਹੈ ਦੀਵੇ ਨੂੰ ਜਦੋਂ ਜੀ ਕਰੇ ਜਗਾ ਲਓ ਜਦੋਂ ਜੀ ਕਰੇ ਬੁਝਾ ਲਓ ਪਰ ਸੂਰਜ ਦਾ ਪ੍ਰਕਾਸ਼ ਤੁਸੀਂ ਮਿਟਾ ਨਹੀਂ ਸਕਦੇ ਕੋਈ ਆਖੇ ਪਈ ਮੈਂ ਦਰਵਾਜੇ ਬੰਦ ਕਰ ਦਿਆ ਪਿਛਲੀ ਕੋਠੜੀ ਵਿੱਚ ਚਲੇ ਜਾਵਾਂ ਮੈਂ ਕਹਿੰਦਾ ਕੁਛ ਵੀ ਕਰ ਲੈ ਸੂਰਜ ਨੇ ਪ੍ਰਕਾਸ਼ ਕਰਨਾ ਹੀ ਕਰਨਾ ਹੈ ਇਹਦਾ ਨਾਮ ਹੈ ਚੇਤਨ ਪ੍ਰਕਾਸ਼ ਤੋਂ ਅੱਗੇ ਚੱਲ ਕੇ ਜਦੋਂ ਐਸਾ ਹੋਇਆ ਤੇ ਪ੍ਰਕਾਸ਼ ਤੇ ਇਸੇ ਤਰ੍ਹਾਂ ਹੀ ਪ੍ਰਕਾਸ਼ ਹੋਰ ਵੀ ਆਏ ਸ਼ੀਸ਼ੇ ਵਿੱਚ ਵੀ ਪ੍ਰਕਾਸ਼ ਆ ਤੁਸੀਂ ਦੇਖਣਾ ਕਦੀ ਸ਼ੀਸ਼ਾ ਜਦੋਂ ਦੇਖਦੇ ਆ ਨਾ ਉਹਦੇ ਅੰਦਰ ਆਪਣਾ ਪਰਛਾਵਾਂ ਦਿਸਦਾ ਸ਼ੀਸ਼ੇ ਦੇ ਅੰਦਰ ਪ੍ਰਕਾਸ਼ ਹੈ ਪਰ ਇਹ ਵੀ ਜੜ ਪ੍ਰਕਾਸ਼ਾ ਜਿੰਨਾ ਚਿਰ ਤੁਹਾਨੂੰ ਜ਼ਰੂਰ ਤੇ ਤੁਸੀਂ ਵੇਖ ਸਕਦੇ ਹੋ ਜਦੋਂ ਜੀ ਕਰੇ ਸ਼ੀਸ਼ਾ ਰੱਖ ਲਿਓ ਤੇ ਕਬੀਰ ਕਹਿੰਦੇ ਨੇ ਇਹ ਜਿੰਨੇ ਵੀ ਧਰਮ ਸ਼ਾਸਤਰ ਨੇ ਨਾ ਸੰਸਾਰ ਵਿੱਚ 베ਦ ਪੁਰਾਨ ਤੇ ਕਿਤੇਬ ਤੇ ਕੁਰਾਨ ਇਹ ਸਾਰੇ ਜਿੰਨੇ ਧਰਮ ਗ੍ਰੰਥ ਨੇ ਇਹ ਸਾਰੇ ਸ਼ੀਸ਼ੇ ਨੇ ਇਹਨਾਂ ਵਿੱਚ ਵੀ ਪ੍ਰਕਾਸ਼ ਹੈ ਕਹਿੰਦੇ ਨੇ 베ਦ ਕਿਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਇਹ ਸ਼ੀਸ਼ੇ ਨੇ ਇਨਾਂ ਨੂੰ ਪੜਨ ਤੋਂ ਦਿਲ ਦੀ ਚਿੰਤਾ ਪਰੇਸ਼ਾਨੀ ਨਹੀਂ ਮਿਟ ਸਕਦੀ ਮਨ ਟਿਕ ਨਹੀਂ ਸਕਦਾ ਟਕ ਧਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਜਦੋਂ ਕਿਤੇ ਤੁਸੀਂ ਆਪਣੇ ਭਾਵੇਂ ਕੋਈ ਥੋੜੇ ਮਿੰਟਾਂ ਵਾਸਤੇ ਮਨ ਨੂੰ ਠਿਕਾ ਕੇ ਤੇ ਗੁਰੂ ਚਰਨਾਂ ਨਾਲ ਜੋੜ ਦਿਓਗੇ ਜਾਗਦੀ ਜੋਤ ਨਾਲ ਉਸੇ ਵੇਲੇ ਤੁਹਾਡੇ ਚਾਰ ਚੁਫੇਰੇ ਖੁਦਾ ਫਿਰਨ ਲੱਗ ਜਾਏਗਾ ਅਕਾਲ ਕਬੀਰ ਕਹਿੰਦਾ ਮੇਰੇ ਤੇ ਸਤਿਗੁਰੂ ਨੇ ਇੰਨੀ ਕਿਰਪਾ ਕਰ ਦਿੱਤੀ ਓ ਲੋਕੋ ਮੇਰਾ ਮਨ ਨਿਰਮਲ ਕਰ ਦਿੱਤਾ ਜਾਗਦੀ ਜੋਤ ਮੇਰਾ ਸਤਿਗੁਰੂ ਹੈ ਜਸਲੇ ਨਾਮ ਦੀ ਦਾਤ ਬਖਸ਼ੀ ਤੇ ਨਾਮ ਦੀ ਦਾਤ ਲੈ ਕੇ ਤੇ ਮਨ ਹੁਣ ਨਿਰਮਲ ਹੋ ਗਿਆ ਲੋਕੀ ਰੱਬ ਨੂੰ ਲੱਭਦੇ ਫਿਰਦੇ ਤੇ ਮੇਰੇ ਮੈਨੂੰ ਰੱਬ ਆਵਾਜ਼ਾਂ ਮਾਰਦਾ ਫਿਰਦਾ ਕਿਸ ਤਰ੍ਹਾਂ ਕੀ ਕੀਤਾ ਤੁਸੀਂ ਕਹਿੰਦਾ ਮੈਂ ਕੁਛ ਨਹੀਂ ਕੀਤਾ ਨਾ ਤੇ ਮੇਰੇ ਕੋਲ ਪੰਜ ਖਕਾਰ ਨੇ ਨਾ ਮੈਂ ਕੂਜਾ ਬਾਂਗ ਮਸੱਲਾ ਤਾਰੀਆਂ ਨਾ ਮੇਰੇ ਕੋਲ ਕੋਈ ਦੰਦ ਕਮੰਡਲ ਕੇਵਲ ਮਨ ਨਿਰਮਲ ਹੋ ਨਾਮ ਜਪਣ ਤੋਂ ਗੁਰੂ ਨੂੰ ਮਿਲਣ ਕਰਕੇ ਜੋਤ ਨੇ ਕਿਰਪਾ ਕੀਤੀ ਏ ਮੇਰੇ ਤੇ ਮੇਰੇ ਪਿੱਛੇ ਪਿੱਛੇ ਕਹਿੰਦੇ ਨੇ ਕਬੀਰ ਕਹਿੰਦੇ ਨੇ ਅੱਜ ਕਬੀਰ ਮਨ ਨਿਰਮਲ ਪਿਆ ਤੇ ਜੈਸਾ ਗੰਗਾ ਕਬੀਰ ਮਨ ਪਿਆ le paya sa ganga dir kabir mandir mal paya sa ganga dir तो चले गोहर फिरे कै कबीर कबीरा तो चले गोहर फिरे हर सुधि में नथी ओ कबीर मदिरा म लपय ਜੋਤੀ ਟਿੱਕਰ ਪਾ ਹੋਈ ਮਰੇ ਤੇ ਤਾਂ ਮੈਂ ਅਰਜ ਕਰ ਰਿਹਾ ਸਾਂ ਇਹ ਜਿੰਨੇ বেদ ਸ਼ਾਸਤਰ ਨੇ ਇਹਨਾਂ ਵਿੱਚ ਵੀ ਪ੍ਰਕਾਸ਼ ਹੈ ਪਰ ਜੜ ਪ੍ਰਕਾਸ਼ ਹੈ ਨਾ ਦੁਨੀਆ ਦੇ ਧਰਮ ਗ੍ਰੰਥ ਜਿੰਨੇ ਵੀ ਬੜੇ ਹੋਏ ਨੇ ਮੈਂ ਕਹਿੰਦਾ ਸਕੂਲਾਂ ਦੀਆਂ ਪੁਸਤਕਾਂ ਵਿੱਚ ਵੀ ਪ੍ਰਕਾਸ਼ ਹੈ ਬੱਚਿਆਂ ਨੂੰ ਕੀਤਾ ਜਾਂਦਾ ਗਿਆਨ ਇਹਨਾਂ ਵਿੱਚ ਗਿਆਨ ਸੁਪਿਆ ਹੋਇਆ ਹੈ ਪੁਸਤਕਾਂ ਵਿੱਚ ਸਕੂਲਾਂ ਦੀਆਂ ਵਿੱਚ ਪਰ ਜੇ ਸਕੂਲਾਂ ਦੀਆਂ ਧਰਮ ਪੁਸਤਕਾਂ ਜਿੰਨੀਆਂ ਕਿਤਾਬਾਂ ਨੇ ਜੇ ਉਹ ਆਪਣੇ ਆਪ ਗਿਆਨ ਕਰ ਸਕਣ ਤੇ ਮਾਸਟਰ ਤੇ ਹੈਡਮਾਸਟਰ ਰੱਖਣ ਦੀ ਕੋਈ ਜ਼ਰੂਰਤ ਨਹੀਂ ਅੱਜ ਲੱਖਾਂ ਦੀਆਂ ਲੱਖਾਂ ਦੀ ਤਦਾਦ ਵਿੱਚ ਮਾਸਟਰ ਤੇ ਹੈਡਮਾਸਟਰ ਮੈਂ ਉਸ ਮਾਸਟਰ ਤੇ ਹੋਰ ਕਈ ਕਈ ਅਹੁਦਿਆਂ ਦੇ ਮਨੁੱਖ ਰੱਖੇ ਹੋਏ ਨੇ ਇਹ ਸਾਰੇ ਪੈਸੇ ਬਚ ਸਕਦੇ ਨੇ ਮੈਂ ਅਰਜ ਕਰ ਰਿਹਾ ਸਾਹਿਬ ਕਿ ਜਨਪ੍ਰਕਾਸ਼ ਤੇ ਚੇਤਨ ਪ੍ਰਕਾਸ਼ ਦੀ ਵਿਚਾਰ ਜਿੰਨੇ ਦੁਨੀਆਂ ਦੇ ਧਰਮ ਪੁਸਤਕ ਨੇ ਇਹਨਾਂ ਦੇ ਵਿੱਚ ਪ੍ਰਕਾਸ਼ ਛिपਿਆ ਹੋਇਆ पर ए मनुख दे अधीन है ए नाम है जड़ प्रकाश ये लोड पवे तुसी पढ़ सकते हो। नहीं लोड रख लो रख छड़ो अपने आप कभी किसी धर्म पुस्तक ने प्रचार नहीं कीता प्रकाश नहीं कीता आज तक भी मैं कहंदा सारी दुनिया दे धर्म पुस्तक किसी स्टेज ते रख दईए सँगार के रख दियो ए किसी व्यक्ति नु उडीकणगे ਜਿੰਨਾ ਚਿਰ ਕੋਈ ਵਿਅਕਤੀ ਨਾ ਉੱਤੇ ਆਣ ਕੇ ਬੈਠੇਗਾ ਉਹਨਾਂ ਚਿਰ ਇਹ ਲੋਕਾਂ ਦਾ ਤਾਂ ਆਪਣੀ ਆਵਾਜ਼ ਨਹੀਂ ਪਹੁੰਚਾ ਸਕਦੇ ਮੈਂ ਅਰਜ਼ੇ ਕਰ ਰਿਹਾ ਕਿਸੇ ਗ੍ਰੰਥੀ ਦੀ ਜ਼ਰੂਰਤ ਪੈਗੀ ਕਿਸੇ ਪਾਦਰੀ ਦੀ ਜ਼ਰੂਰਤ ਪੈਗੀ ਕਿਸੇ ਮੁਲਾਣੇ ਦੀ ਜ਼ਰੂਰਤ ਪੈਗੀ ਕਿਸੇ ਪੰਡਤ ਦੀ ਜ਼ਰੂਰਤ ਪੈਗੀ ਤਾਂ ਪ੍ਰਕਾਸ਼ ਹੋਵੇਗਾ ਨਹੀਂ ਤੇ ਨਹੀਂ ਹੋ ਸਕਦਾ ਜਿੰਨਾ ਵੀ ਬੇਤਕ ਕਿਤਾਬਾਂ ਵਿੱਚ ਇਹ ਪ੍ਰਕਾਸ਼ ਹੈ ਜੜ ਪ੍ਰਕਾਸ਼ ਹੈ ਸਾਰਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨਾ ਮੰਨਿਓ ਸਿਮਰਤ ਸਾਸ਼ਤਰ ਵੇਦ ਸਭਾ ਬਹੁ ਭੇਦ ਕਹੇ ਹਮ ਇਕ ਨਾ ਜਾਣਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਮੈਂ ਵੇਦ ਕਿਤਾਬਾਂ ਦੇ ਪਿੱਛੇ ਨਹੀਂ ਲੱਗਦਾ ਮੈਂ ਇਹਨਾਂ ਨੂੰ ਮੰਨਦਾ ਨਹੀਂ ਕਿਉਂਕਿ ਜੜ ਪ੍ਰਕਾਸ਼ ਹੈ ਇਹ ਜਿੰਨਾ ਪ੍ਰਕਾਸ਼ ਹੈ ਇਹ ਆਪਣੀ ਆਪਣੀ ਆਪ ਲੋਕਾਂ ਤੱਕ ਆਪਣੀ ਆਵਾਜ਼ ਕਿਸੇ ਨੇ ਪਹੁੰਚਾਈ ਮੈਂ ਨਹੀਂ ਮੰਨਦਾ ਇਹਨਾਂ ਨੂੰ ਤੋਂ ਮੈਂ ਅਰਜ ਕਰ ਰਿਹਾ ਸਾ ਇਹਨਾਂ ਨੇ ਇਹਦੇ ਬਾਰੇ ਕਬੀਰ ਆਪਣੀ ਵਿਚਾਰ ਦਿੰਦੇ ਨੇ ਕਹਿੰਦੇ ਨੇ ਕਬੀਰ ਕਾਗਦ ਕੀ ਓਬਰੀ ਮਸ ਕੇ ਕਰਮ ਕਪਾਟ ਤੇ ਪਾਹਨ ਬੋੜੀ ਪ੍ਰਥਮੀ ਪੰਡਤ ਪਾਰੀ ਬਾਟ ਕਬੀਰ ਕਹਿੰਦੇ ਨੇ ਇਹ ਜਿੰਨੇ ਧਰਮ ਗ੍ਰੰਥ ਸੰਸਾਰ ਦੇ ਬੜੇ ਨੇ ਇਹ ਕਾਗਜ਼ਾਂ ਦੀ ਇੱਕ ਕੋਠੜੀ ਨੇ ਤੇ ਇਹਨਾਂ ਨੂੰ ਕਰਮ ਕਾਟ ਦੇ ਤਖਤੇ ਲੱਗੇ ਹੋਏ ਨੇ ਮਸ ਕੇ ਕਰਮ ਕਪਾਟ ਸਿਆਹੀ ਨਾਲ ਸੇ ਆਈ तस्ते ਤਸਤੇ ਬੜੇ ਹੋਏ ਹੁੰਦੇ ਉਹ ਲੱਗੇ ਹੋਏ ਨੇ ਕਪ ਕਵਾੜ ਇਹਨਾਂ ਨੂੰ ਇਸ ਕੋਠੜੀ ਨੂੰ ਤੇ ਕਹਿੰਦੇ ਨੇ ਜਿਹੜੇ ਬ੍ਰਾਹਮਣ ਤੇ ਪੰਡਿਤ ਲੋਕ ਸਣਨਾ ਇਹਨਾਂ ਨੇ ਪੇਧ ਸ਼ਾਸਤਰ ਹੱਥ ਵਿੱਚ ਫੜ ਕੇ ਰਾਹ ਵਿੱਚ ਖਲੋ ਗਏ ਲੋਕਾਂ ਨੂੰ ਲੁੱਟਣ ਵਾਸਤੇ ਤੇ ਪੱਥਰ ਨੂੰ ਜਿਹੜੇ ਪੂਜਾ ਕਰਦੇ ਸਣ ਉਹਨਾਂ ਨੇ ਸਾਰੀ ਪ੍ਰਿਥਵੀ ਡੋਬ ਦਿੱਤੀ ਅਰਜ ਕਰ ਰਿਆ ਸਾ ਲੋਕਾਂ ਨੂੰ ਪੱਥਰ ਨਾਲ ਜੋੜ ਦਿੱਤਾ ਤੇ ਕਬੀਰ ਕਹਿੰਦੇ ਨੇ ਕਬੀਰ ਪਾਹਣ ਪਰਮੇਸ਼ਰ ਕੀਆ ਤੇ ਪੂਜਾ ਸਰ ਸੰਸਾਰ ਵੇਖੋ ਲੋਕੋ ਦੁਨੀਆ ਦੇ ਲੋਕੋ ਉਹ ਜੜ ਪੂਜਾ ਕਿੰਨੀ ਹੋ ਰਹੀ ਆ ਸੰਸਾਰ ਵਿੱਚ ਪੱਥਰ ਦੀ ਪੂਜਾ ਕਰਨੀ ਸਾਰੀ ਜੜ ਪੂਜਾ ਕਹਿੰਦੇ ਨੇ ਪਾਹਣ ਪਰਮੇਸ਼ਰ ਕੀਆ ਜਿਨ੍ਹਾਂ ਨੇ ਪੱਥਰ ਨੂੰ ਪਰਮੇਸ਼ਰ ਮੰਨ ਲਿਆ ਤੇ ਸਾਰੀ ਦੁਨੀਆ ਹੀ ਪੂਜਾ ਕਰੀ ਜਾਂਦੀ ਆ ਵਿਚਾਰ ਹੈ ਹੀ ਨਹੀਂ ਆ ਜਿਸ ਤਰ੍ਹਾਂ ਗੱਡੀਆਂ ਵਾਲਿਆਂ ਨੂੰ ਕੋਈ ਵਿਚਾਰ ਨਹੀਂ ਇਹੋ ਹੀ ਗੱਲ ਮਾਰਜ ਕਰ ਰਿਹਾ ਸਾਂ ਪੂਜੇ ਸਭ ਸੰਸਾਰ ਪਰ ਕਬੀਰ ਇੱਕ ਚਿਤਾਵਨੀ ਦਿੰਦੇ ਨੇ ਉਹ ਕਹਿੰਦੇ ਨੇ ਆ ਜੀ ਇਸ ਪਰਵਾਸੇ ਜੋ ਰੇ ਤੇ ਬੁੱਢੇ ਕਾਲੀ ਤਾਰ ਇਸ ਪਰਵਾਸੇ ਜੋ ਬੁੱਢੇ ਕਾਲੀ ਤਾਰ ਜੋ ਰਹੇ ਡੁੱਡੇ ਕਾਲੀ ਇਸ ਪਰਵਾਸੇ ਜੋ ਕਾਲੀ ਧਾਰ ਆਲੀ